ਅਜੇ ਰਹਿ ਕੇ ਸਾਹਿਬ ਸਮਾ ਲੇ ਹੁਕਮ ਹੰਦੀ ਸੁਵਾਲ ਇਹ ਗੁਰਦੁਆਰਾ ਵੀ ਨੱਖ ਜਿਹੜਾ ਉਰੇ ਆਇਆ ਫਿਰਦਾ ਗੁਰਦੁਆਰਾ ਜਿੱਤੇ ਦਵਾਰੇ ਦੇ ਵਿੱਚ ਗੁਰ ਸੱਚ ਖੜ ਜਾਈਦਾ ਗੁਰੂ ਕੋਲ ਜਾਈਦਾ ਬਾਹਰ ਦੀ ਬਿਲਡਿੰਗ ਦੀ ਕੋਈ ਗੱਲ ਨਹੀਂ ਹੈਗੀ ਬਿਲਡਿੰਗ ਹੁੰਦੀ ਗੁਰੂ ਬਾਹਰ ਹੁੰਦਾ ਹੀ ਸ਼ਬਦ ਗੁਰੂ ਉਹ ਸ਼ਬਦ कह ਕਿਹਾ ਜਾਏ ਸ਼ਬਦ ਬਿਨਾਂ ਕਰਨਾ ਤੇ ਸੁਣਣਾ ਅਜੀ ਉਹ ਸ਼ਬਦ ਗੁਰੂ ਦਾ ਵੀ ਭਲੇਖਾ ਪਾ ਲਿਆ ਸ਼ਬਦ ਗੁਰੂ ਗ੍ਰੰਥ ਨੂੰ ਕਹਿਣ ਲੱਗੇ ਪੋਥੀ ਸਾਹਿਬ ਨੂੰ ਕਹਿਣ ਲੱਗੇ ਇਹ ਵੀ ਗਲਤ ਹੈ ਪੋਥੀ ਜਿਹੜੀ ਹੁੰਦੀ ਇਹ ਕਿਹਾ ਤਾਂ ਨਾਮ ਹੀ ਹੋਇਆ ਗਿਆਨ ਹੀ ਹੋਇਆ ਗਿਆਨ ਦੇ ਗੀਤੇ ਹੋਏ ਨੇ ਲਿਖੇ ਹੋਏ ਚਲੋ ਜਿਹੜੀ ਹੈ ਭਗਤੀ ਹੈ ਪਰਮੇਸ਼ਰ ਦੀ ਉਹ ਲਿਖੀ ਹੋਈ ਹੈ ਇਹਦੇ ਤੇ ਪਰ ਇਹਨੂੰ ਵੀ ਨਮਸ਼ਕਾਰ ਤਾਂ ਕਰਦੇ ਨੇ दे ਉਹ ਕੀ ਲਿਖੇ ਹੋਏ ਪਹਿਲਾਂ ਤਾੜੀ ਦੇ इंदू मटाळे रुदाहार कह रहे वे तुसी ताडी दे रत्नु चरना दंत नी मानदे नीच समले दियो सा जदो पबा अड्डे जेडे रे दे परमेश्वर दी भक्ति दे जदो एते शब्द लिखे जांदे ने अक्षर लिखे जांदे ने फेर तुसी नमस्कार करदे हो सारी दुनिया ही करदी है ਇਸ ਕਰਕੇ ਭਾਵੇਂ ਮੈਂ ਨੀਚ ਘਰ ਜੰਮਿਆ ਜਾਂ ਮੇਰੇ ਹਿਰਦੇ ਵਿੱਚ ਸਭ ਕੁਝ ਲਿਖਿਆ ਹੋਇਆ ਹੈ ਭਗਵਤ ਤਾਂ ਮੈਂ ਉੱਚ ਕਿਉਂ ਨਹੀਂ ਇਸ਼ਾਰਾ ਇੱਧਰ ਮੈਨੂੰ ਅਜੋ ਵੀ ਨੀਚ ਕਹੇ ਜਾਂਦੇ ਪੱਤੇ ਦਾ ਉੱਚ ਬਣ ਲੈਨੇ ਹੋ ਤੁਸੀਂ ਨਾਲ ਤਾੜੀ ਦੇਨੇ ਤਾੜੀ ਦੇ ਦੇ ਮੈਨੂੰ ਅਜੋ ਨੀਚ ਬਣਾਈ ਜਾਂਦੇ ਫਿਰ ਪੈਰਿੰਗ ਪੈ ਗਿਆ ਫਿਰ ਬੇਪਰ ਪਰਦਾ ਜਿਹੜੇ ਸੀ ਉਹ ਰਡਾ ਰਡਾ ਉਬਦੇ ਇਸ ਕਰਕੇ ਇਹ ਹੈ ਤਾਂ ਅਖਰੇ ਸ਼ਬਦ ਤਰੀ ਹੈ ਸ਼ਬਦ ਹੁੰਦਾ ਕੱਲਾ ਦਾ ਵਿਸ਼ਾ ਅੱਖਰ ਹੁੰਦੇ ਅੱਖਰ ਦਾ ਵਿਸ਼ਾ ਇਹ ਅੱਖਰ ਨਾ ਪੜਨ ਵਾਲੀ ਚੀਜ਼ ਹੈ ਸ਼ਬਦ ਹੁੰਦਾ ਹੀ ਕਰਨ ਵਾਲੀ ਸੁਣਨ ਵਾਲੀ ਚੀਜ਼ ਹੈ ਸ਼ਬਦ ਤੋਂ ਲਾ ਨਾ ਆਵਾਜ਼ ਦਾ ਨਾ ਸ਼ਬਦ ਗੁਰੂ ਸੁਰਤ ਤੁਣ ਚੇਲਾ ਇੱਥੋਂ ਦੇ ਅਰਥ ਰਿਹਾ ਗੁਰੂ ਸੁਰਤ ਜਿਹੜੀ ਹੈ ਉਹ ਤੁਣੀ ਦੇ ਵਿੱਚ ਟਕਾਉਣੀ ਹੈ ਆਵਾਜ਼ ਦੇ ਵਿੱਚ ਸੁਰਤ ਜੋੜਨੀ ਜੇ ਆਵਾਜ਼ ਦੇ ਵਿੱਚ ਸੁਰਤ ਜੁੜਦੀ ਹੈ ਤਾਂ ਸਮਝ ਆਉਂਦੀ ਹੈ ਕੀ ਕਹਿਿਆ ਕਰਨ ਵਾਲੇ ਨੇ ਆਪਾਂ ਜਿਹੜਾ ਬਾਹਰੋਂ ਵੀ ਸ਼ਬਦ ਸੁਣਦੇ ਜੇ ਧਿਆਨ ਨਾਲ ਨਾ ਸੁਣੀਏ ਤਪਦੇ ਹੀ ਲੱਗਦਾ ਕੀ ਕਹਿ ਗਿਆ ਕਹਨ ਨਾਲ ਐਵੇਂ ਹਿਰਦੇ ਵਿੱਚ ਟਿਕ ਕੇ ਹੀ ਉਹ ਧਿਆਨ ਜੋੜ ਕੇ ਹੀ ਬਿਨਾ ਕਰਨਾ ਦੇ ਸੁਣਵਾੜੀ ਬਾਣੀ ਸੁਣੀ ਜਾਂਦੀ ਹੈ ਉਹ ਈ ਤੁਰਕੀ ਬਾਣੀ ਹੈ ਉਹਨੂੰ ਸ਼ਬਦ ਗੁਰੂ ਕਿਹਾ ਗੁਰੂ ਕੀ ਹੁੰਦਾ ਗੁਰੂ ਜਿਹੜਾ ਹੈਗਾ ਚਾਨਣ ਕਰ ਦਿੰਦਾ ਹਨੇਰੇ ਤੋਂ ਇਹ ਇਹਦੇ ਤੋਂ ਉਹ ਉਪਦੇਸ਼ ਚਾਣਨ ਕਰਦਾ ਉਹ ਉਪਦੇਸ਼ ਦੇ ਵਿੱਚੋਂ ਜੇ ਗਿਆਨ ਸਮਝ ਆਉਂਦਾ ਜੇ ਉਪਦੇਸ਼ ਚਾਣਨ ਕਰਦਾ ਜਨਰੇਟਰ ਸਰਵ ਚੱਲਣਾ ਚੱਲਣਾ ਨਹੀਂ ਹੁੰਦਾ ਥੋੜਾ ਜਿਹੀ ਰੋਜ਼ਵਾਲੀ ਸੁਣਦੇ ਆਂ ਅੱਡ ਨਾਲ ਕੁਰਬਾਨੀ ਹੁੰਦੇ ਆਂ ਅੱਡ ਨਾਲ ਚਾਣਨ ਕਿਉਂ ਨਹੀਂ ਹੋ ਰਿਹਾ ਕਿਸੇ ਨੂੰ ਸਮਝ ਨਹੀਂ ਆ ਰਹੀ ਗਿਆਨ ਹੋਣਾ ਸਮਝ ਆਉਣਾ ਜਿਹੜਾ ਸਮਝ ਆਣੀ ਹੈ ਜੋ ਸਮਝ ਉਹ ਜੋ ਆਣੀ ਹੈ ਉਹ ਗਿਆਨ ਗੁਰੂ ਹੈ ਉਹਨੂੰ ਗਿਆਨ ਗੁਰੂ ਕਹਿੰਦਾ ਉਹ ਗਿਆਨੂ ਵੀ ਗੁਰੂ ਕਿਹਾ ਹੈ ਸ਼ਬਦ ਵਿੱਚ ਹੈ ਨਾ ਗਿਆਨ ਗੁਰਬਾਣੀ 'ਚ ਗਿਆਨ ਗੁਰੂ ਤਾਂ ਹੈ ਲੇਕਿਨ ਸ਼ਬਦ ਗੁਰੂ ਹੋ ਸੀ ਜਿਹੜਾ ਬਿਨਾਂ ਕੱਢਦੇ ਥੋੜੇ ਇਹਦੇ 'ਚ ਗਿਆਨ ਗੁਰੂ ਹੈ ਉਹ ਨਾਮ ਸੀ ਗਿਆਨ ਉਹ ਤਾਂ ਨਾਮ ਸੀ ਸ਼ਬਦ ਨਾਮ ਸੀ ਉਹ ਗਿਆਨ ਨਾਮ ਨੂੰ ਸੁਣ ਕੇ ਗਿਆਨ ਕਰਾਈਦਾ ਹੁੰਦਾ ਹੈ ਗਿਆਨ ਕਰਾਇਆ ਜਾਂਦਾ ਜੇਤਾ ਸੁਣਨਾ ਜੇਤਾ ਨੂੰ ਜੇਤਾ पे क्रतेता देना जेटा जेटा बोलना देता ज्ञान हां जी जेटा 70 दोष्ट 70 जाका एक संभाना ਜੇ ਤਾ ਬੋਲਣ ਤੇ ਤਾ ਗਿਆਨ ਜਿਹੜਾ ਦੁਸ਼ਟ ਨੂੰ ਔਰ ਮਿੱਤਰ ਨੂੰ ਬਰਾਬਰ ਸਮਝਦਾ ਉਹ ਜੋ ਬੋਲਦਾ ਸਾਰਾ ਗਿਆਨ ਹੁੰਦਾ ਤਤ ਗਿਆਨ ਹੁੰਦਾ ਜੇ ਤਾ ਸੁਣਨਾ ਤੇ ਤਨ ਆਬ ਜੋ ਸੁਣਦਾ ਨਾਮ ਹੁੰਦਾ ਨਾਮ ਨੂੰ ਸੁਣ ਕੇ ਹੀ ਕਰਾਇਆ ਜਾਂਦਾ ਇਹ ਸੁਣਨਾ ਤੇ ਤਨ ਆਬ ਜੇ ਤਾ ਪੇਖਣਾ ਤੇ ਜਿਹੜਾ ਜਿਸ਼ਟਿ ਉਹ ਦੀ ਪੇਖਣ ਚਲੋ ਜਿਹੜਤ ਪੇਖਣ ਤੇ ਧਿਆਨ ਬਣ ਜਾਂਦਾ ਹੈ ਜੜ ਪੇਖਣ ਤੇ ਧਿਆਨ ਬਣ ਜਾਂਦਾ ਫਿਰ ਸਰੀਰ ਨਹੀਂ ਦਿੰਦਾ ਫਿਰ ਮਾਇਆ ਨਹੀਂ ਦਿੰਦੀ ਫਿਰ ਜੋਤ ਦਿੰਦੀ ਹੈ ਸਭ ਨੇ ਫਿਰ ਘਟ ਘਟ ਮੇਂ ਹਰ ਜੁਗ ਉਸੇ ਅੱਖਾਂ ਨਹੀਂ ਦੇਖਦੀਆਂ ਫਿਰ ਧਿਆਨ ਵੇਖਦਾ ਧਿਆਨ ਨਾਲ ਪੇਖਣ ਨਾਲ ਅੱਖ ਨਾਲ ਦੇਖਣ ਨਾਲ ਧਿਆਨ ਨਾਲ ਸੁਣਨਾ ਹੁੰਦਾ ਧਿਆਨ ਨਾਲ ਸਮਝਣਾ ਹੁੰਦਾ ਇਹ ਨਿਹਰਾਕਾਰੀ ਦੁਨੀਆ ਚਲੇ ਗਿਆ ਹੁਣ ਬਾਹਰਲੀ ਦੁਨੀਆ ਚ ਨਹੀਂ ਰਹੇ ਧਿਆਨ ਨਾਲ ਸੁਣਨਾ ਧਿਆਨ ਨਾਲ ਸਮਝਣਾ ਧਿਆਨ ਨਾਲ ਦੇਖਣਾ ਉਹਦੀ ਬੁੱਧੀ ਦਾ ਲੈਵਲ ਦੇਖ ਲੈਣਾ ਕਿੱਥੇ ਬੋਲਦਾ ਉਦੀ ਆਤਮਾ ਕਿੰਨੀ ਨਿਰਵਲ ਹੈ ਦੇਖ ਲੈਣੀ ਇਹ ਦੇਖਿਆ ਜੀ ਨਾਲ ਕਰਨ ਇਹ ਦੇਖਦੇ ਰਹੇ ਆਹ ਪਤਾ ਲੱਗਦਾ ਹੀ ਹੈ ਇਸ ਦਾ ਗੁਰੂਦvare ਹੋਏ ਕੇ ਸਾਹਿਬ ਸੰਭਾਲੇ ਹੋ ਗੁਰੂਦvare ਹੋਏ ਕੇ ਜੇ ਧਿਆਨ ਅੰਦਰ ਹੈ ਜੀ ਆਤਮ ਧਿਆਨ ਹੀ ਹੈ ਸਾਹਿਬ ਸਦਾ ਹਜ਼ੂਰ ਹੈ ਬਲ ਮੇਕੇ ਚਾਉਂਡ ਕੱਟ ਕੇ ਅੰਤਰ ਜੋਤ ਧਰਿਓ ਸਾਹਿਬ ਹੋਏ ਕੇ ਸਾਹਿਬ ਸੁਭਾਲੇ ਕਿਉਂਕਿ ਗੁਰੂਦvare ਜੋ ਕੋ ਬੋਲੇ ਪਰਗਟ ਹੁਣ ਸ਼ਬਦ ਗੁਰੂ ਜਿੱਥੇ ਪ੍ਰਗਟ ਹੁਣ ਉਸ ਨੂੰ ਗੁਰੂਦਵਾਰਾ ਕਹਿੰਦੇ ਹੋ ਹਿਰਦੈ ਉੱਤੇ ਸੁਣ ਲੈ ਉੱਥੋਂ ਗਾਂ ਨਹੀਂ ਹੁੰਦਾ ਸਿਰ ਉੱਤੇ ਸੁਣ ਸਾਹਿਬ ਸਦਾ ਹਜੂਰ ਹੈ ਬਾਹਰ ਸੁਣਦਾ ਕੰਨਾਂ ਨਾਲ ਬੇਰਾ ਗੱਲਾਂ ਤੇ ਉੱਥੇ ਨਹੀਂ ਸੁਣਦੀ ਸਾਹਿਬ ਸਦਾ ਹਜੂਰ ਹੈ ਜਿਹੜਾ ਸਾਹਿਬ ਹੈ ਉਹ ਤਾਂ ਸਦਾ ਹਜੂਰ ਹੈ ਸਾਹਿਬ ਤਾਂ ਇਹਦੇ ਨਾਲ ਦਾ ਇਹ ਬੂੜੇ ਸਾਹਿਬ ਜੀਬ ਦਾ ਬੂੜ ਸਾਹਿਬ ਹੈ ਦਾ ਪਰ ਸਾਹਿਬ ਨਹੀਂ ਬੋਲਦਾ ਉਹ ਸਾਹਿਬ ਨਹੀਂ ਬੋਲਦਾ ਸਾਹਿਬ ਦੇ ਵਿਚਲੀ ਹੁਕਮ ਹੁੰਦਾ ਹੈ ਮੋਬਾਈਲ ਹੀ ਬੋਲਦਾ ਸਾਹਿਬ ਦਾ ਮੋਬਾਈਲ ਹੈ ਮੈਸੇਜ ਦਰਗਾਹ ਦਾ ਹੁੰਦਾ ਉਹਦੇ ਵਿਚਦੀ ਹੁੰਦਾ ਬੋਲਣ ਲੱਗੋ ਹੋਰ ਉਹਨਾਂ ਨੂੰ ਬੋਲਣ ਵਾਲਾ ਕੋਈ ਮੋਬਾਈਲ ਦੇ ਵਿੱਚੋਂ ਨਹੀਂ ਬੋਲਦਾ ਮੋਬਾਈਲ ਦੇ ਵਿੱਚੋਂ ਬੋਲਦਾ ਸਹਿਬ ਤਾਂ ਜਦੋਂ ਮੈਂ ਆਪ ਬੋਲਣ ਸਭ ਹੁਕਮ ਹੈ ਹੁਕਮ ਪਾਸ ਕਰਦਾ ਸਿਰ ਤੁਹਾਡੇ ਤੱਕ ਕੁਝ ਨਹੀਂ ਬੋਲਦਾ ਜਾਂ ਮਾਨੇ ਜਾਂ ਫਿਰ ਫਰਮਾਨ ਦਰਗਾਹ ਦਾ ਪਰ ਦੋ ਵਜਾਂ ਨੇ ਸੰਸਾਰ ਚ ਕੋਈ ਆਵਾਜ਼ ਦੀ ਚੀਜ਼ ਨਹੀਂ ਇਸ ਸਾਧ ਸਾਧਾ ਜੂਰੇ ਨੂੰ ਕਿਵੇਂ ਲੈਣਾ ਜੀ ਆਪਾਂ ਸਹਿਬ ਸਾਧਾ ਗੁਰਮੇਰਾ ਸੰਗ ਸਦਾ ਹੈ ਨਾ ਅੱਛਾ ਬੋਲ ਤੇ ਪਾਪ ਲੈਣਾ ਗਿਆਨ ਦੀ ਹੁੰਦਾ ਜਿਹੜਾ ਪੁਰਾਣਾ ਨਹੀਂ ਹੁੰਦਾ ਉਹ ਨਵਾਂ ਹੀ ਹੁੰਦਾ। ਤੇ ਤਾਂ ਨਵੀਂ ਸੋਚ ਹੀ ਦਿੰਦਾ। 84 ਲੱਖ ਕੋਈ ਉਹ ਸੋਚ ਹੀ ਦਿੰਦਾ ਹੀ ਨੇ। ਨਵੀਂ ਤਾਂ ਨਵਾਂ ਰੋਜ਼ ਆਪ ਕੋ ਲੋਕ ਪੜ ਕੇ ਆਉਂਦੇ ਰੋਜ਼ ਹਮੜਾ ਹੈ। परमे के छोड़ कटका अंतर ज्योत तरयो साहेब सदा हजूर है हजूर दा मतलब की है जेड़ा साहेब तो ऊपर है सर okay. आगे हुकुम ओदीप आगे खड़ा कर दे हर बात अच्छा साहेब सदा हजूर है और हुकुम दे आगे हटना हाजिर रहना ਨਹੀਂ ਲੈ ਦੇ ਸਾਡੇ ਹਜੂਰਾਂ ਨੇੜੇ ਆ ਥੋੜੇ ਥੱਲੇ ਆ ਬਿੱਸਾ ਸਾਹਿਬ ਸਲਾਹ ਹਜੂਰ ਹਜੂਰ ਦਾ ਦਰਗਾਹ ਦੇ ਹਜੂਰ ਹੈ ਉਹ ਰਾਜੇ ਦੇ ਹਜੂਰ ਹੈ ਉਹ ਹਜੂਰ ਤਾਂ ਉਹਦੇ ਆ ਹਜੂਰ ਦੇ ਹਾਜ਼ਰ ਹੈ ਉਹ ਆਰਬਸਤਨ ਦਾ ਉਹ ਇਧਰ ਉਧਰ ਨਹੀਂ ਹੁੰਦਾ ਮਾਨੇ ਤੇ ਉਧਰ ਹੋ ਜਾਂਦਾ ਉਨੀ ਕਦੇ ਵੀ ਇੱਕ ਸਕਿੰਟ ਬਾਅਦ ਤੇ ਹਾਲੇ ਤੱਕ ਦਿਸੰਦਰਾ ਕਰਦਾ ਆਪੋ ਪੋਲਾ ਹੈ ਜਦੋਂ ਇਹ ਭੁੱਲਦਾ ਹੈ ਨਾ ਦਰਗਾਹ ਨੂੰ ਉਦੋਂ ਇਹਦੀ ਸ਼ਕਤੀ ਦੀ ਸ਼ਕਤੀ ਉਹਨਰੇ ਜੇ ਤਾਰ ਇੱਕ ਸਕਿੰਟ ਬਾਅਦ ਤੇ ਵੀ ਜੁੜੂਗੀ ਜੇ ਇਹ ਬਿਲੀ ਹੋ ਜਾਣੀ ਇਹ ਵੀ ਸ਼ਕਤੀ ਕੋਲ ਜੇ ਹਜ਼ੂਰ ਨਾਲ ਉਹ ਸ਼ਕਤੀ ਗਈ ਬਿਲਕੁਲ ਸਾਹ ਹੋਣਾ ਉਹ ਨਹੀਂ ਜੂਰਦਾ ਬ੍ਰਦਰ ਐਸਲੋ ਠੀਕ ਦਰਗਾਹ ਤੋਂ ਪਾਵਰ ਮਢੀ ਹੋਈ ਆ ਉਸ ਉਹ ਤਾਂ ਪਾਵਰ ਘਤੂ ਹੋਗੀ ਪਾਵਰ ਘਤੂ ਨਹੀਂ ਥੀ ਜਉਦਾ ਨਹੀਂ ਰਹਿ ਸਕਦਾ ਉਹਦਾ ਬੰਦਾ ਨਹੀਂ ਕਿਸਾ ਲਪਾਇਆ ਹੋਇਆ ਵੀ ਸਹਾਬ ਜਨਾਬ ਆਪਣੇ ਸਰਵ ਦੇ ਉਹ ਆਪਣੇ ਸਾਹਿਬ ਦੇ ਜੂਰ ਨਹੀਂ ਸਾਹਿਬ ਦੇ ਆਵੇ ਸਾਹਿਬ ਬਣ ਜਾਂਦਾ ਵੇਦਾ ਵੇ ਸਰ ਵਾਪੇ ਸਰ ਬਣਿਆ ਪਰ ਮੈਂ ਕਿਛੌੜ ਕੱਟ ਕੇ ਅੰਤਰ ਜੋਤ ਤਰਿਓ ਤਾਂ ਇਹ ਤਾਂ ਬੋਲ ਆਪੋ ਬੋਲਣ ਜਾਣਦਾ ਇਹ ਤਾਂ ਉਹ ਹੀ ਗੱਲ ਦੱਸਦਾ ਜਿਹੜੀ ਅੰਦਰੋਂ ਦੱਸਦਾ ਕੋਈ ਚਪੜਾਸੀ ਕੀ ਦੱਸੂਗਾ ਕਾਇ ਤਰੀਕ ਇਹ ਚਪੜਾਸੀ ਨੂੰ ਮੇਰੀ ਕਿਹੜੀ ਤਰੀਕ ਹੈ ਪੁੱਛ ਕੇ ਦੱਸਾਂਗਾ ਉਹ ਤਾਂ ਹੀ ਕੋ ਦੱਸਦਾ ਆਪਣੇ ਕੋਲੋਂ ਦੱਸੂਗਾ ਮੈਂ ਉਹ ਵੇਪਰ ਲੈ ਆ ਕੇ ਦੋ ਅੰਦਰੋਂ ਆਪਣੇ ਕੋਲੋਂ ਕੀ ਕਹਿੰਦਾ ਮੇਰੀ ਕਿਹੜੀ ਤਰੀਕ ਹੋਊਗੀ ਕਹ ਰੋਇਆ ਤਾਂ ਸਾਹਿਬ ਨੂੰ ਪਤਾ ਹੋਊਗਾ ਜਾਂ ਪਹੁੰਚ ਕੇ ਦਰ ਮਦਦ ਤੁਹ ਮੈਂ ਤੁਹ ਰੋਕਦਾ ਫਰਮਾ ਜਾਂ ਜਾਂਦਾ ਪਹਿਲਾਂ ਨਹੀਂ ਜਾਂਦਾ ਸਾਹਿਬ ਹੱਥ ਵੜਿਆਈਆਂ ਜਿਸ ਭਾਵੇਂ ਆਪੇ ਵੜਿਆਈਆਂ ਉਹ ਤੋਂ ਹੁਕਮ ਮਿਲੇ ਬੜੇ ਕੋਈ ਗੱਲ ਨਹੀਂ ਉਥੇ ਹੁਕਮਨੋ ਸਾਹਿਬ ਕੀ ਹੈ ਹਾਕਮ ਨਾ ਕੋਈ ਬੜਿਆ ਯੋਕਮ ਨਾਲੇ ਮਿਲਣੀ ਐ ਤੁਹਾਡਾ ਹਾਕਮ ਦੋਲੀ ਆਉਰੇ ਵੀ ਹੁਕਮੇ ਆਉਂਦਾ ਉਹਨੂੰ ਹਾਕਮ ਦਾ ਆਉਂਦਾ ਨਹੀਂ ਹਾਕਮ ਨੂੰ ਹਕੂਮਤ ਵਿੱਚ ਹਾਕਮ ਦੀ ਸ਼ਕਤੀ ਕਮ ਕਰਦੀ ਥੀ ਹੂੰ ਫਿਰ ਹਕੂਮਤ ਵਿੱਚ ਹੰਬਚਾਤ ਦੀ ਸ਼ਕਤੀ ਕਮ ਹੁੰਦੀ ਲੱਗਦਾ ਹੈ ਹਕੂਮਤ ਨਹੀਂ ਲੱਗਦਾ ਕੋਰਟ ਲੱਗਦਾ ਹਕੂਮਤ ਵਿੱਚ ਹਾਕਮ ਦੀ ਸ਼ਕਤੀ ਕਮ ਹੁੰਦੀ ਹਕੂਮਤ ਕੀ ਹਾਕਮ ਦੀ ਸ਼ਕਤੀ ਹੈ ਹੋਰ ਕੀ ਹਾਗਬਰ ਹਾਗਬਰ ਦੀ ਸ਼ਕੀ ਨੂੰ ਦੋਸ਼ ਦਿਆ ਨੇ ਉਹ ਜਾਦਾ ਖਤਰਨਾਕ ਹੈ ਕਿ ਕੰਡੈਮ ਕੋਰਟ ਜਿਹੜਾ ਕੰਡੈਮੋ ਲਾ ਲਾ ਲਾ ਹੁੰਦੇ ਨਹੀਂ ਗਏ ਅਪਰਾਧੀ ਕਰਦਾ ਲਾਦਾ ਤਾਂ ਅਪਰਾਧ ਆਉਂਦੇ ਨਹੀਂ ਜਾਂਦਾ ਉਹ ਕੰਡੈਮ ਕੋਰਟ ਮੰਨੇ ਜਾਂਦਾ ਉਹ ਕੋਰਟ ਲਾ ਥੋੜੀ ਹੈ ਕਿਸੇ ਦੀ ਆਪਾ ਕਾਇਰ ਹੈ ਵਈ ਹੈਲਮਟ ਨਹੀਂ ਲਿਆ ਵਈ ਕਾਨੂੰਨ ਬਣਿਆ ਹੈ ਨਾ ਰਿਆ ਉਹ ਲਾ ਲ ਤੁਸੀਂ ਨੀ ਬਣਿਆ ਲਾਦੀ ਮੈਂ ਕੀ ਕੀਤਾ ਕੋਲਡ ਨੇ ਤਾਂ ਫਿਰ ਜਾ ਅਪਲਾਈ ਕੀਤਾ ਫਿਰ ਵੀ ਨਹੀਂ ਬਣਿਆ ਕੋਈ ਇੱਕ ਹੋਰ ਅਪਰਾਧ ਹੋ ਗਿਆ ਉਹ ਤਾਂ ਵੱਡਾ ਹੋ ਗਿਆ ਜੇ ਬਰੋਲ ਗਏ ਉਹ ਕਹਿੰਦਾ ਤਾਂ ਭਗਿਓ ਹੋ ਗਿਆ ਰਣਾਈ ਮੈਂ ਚਲਾਉਣਾ ਤਾਂ ਨਹੀਂ ਆਮ ਕਰਦਾ ਆ ਜਦ ਕਿ ਉਹ ਦੂਜਾ ਲੈ ਕੇ ਆਉਂਦਾ ਪਰੰਟ ਵੀ ਕੋਈ ਗੱਲ ਦਾ ਕੁਛ ਨਹੀਂ ਦਾ ਬਰੰਟ ਥੋੜੇ ਜਿਗਰ ਦਾ ਥੀ ਲਾਉਣ ਦੀ ਗੱਲ ਹੁੰਦੀ ਏ ਉਹ ਵੀ ਪੁਰਸੇ ਹੁੰਦਾ ਕੱਟ ਕੇ ਅੰਤਰ ਜੋਦ ਭਰਮ ਨੇ ਕੇ ਸ਼ੋਰ ਕੱਟ ਕੇ ਅੰਤਰ ਜੋਤਰ ਆ ਭਰਮ ਦੇ ਜਿਹੜੇ ਪ੍ਰਭਾਵ ਹੈ ਸ਼ੋਰ ਕੀ ਹੁੰਦਾ ਪ੍ਰਭਾਵ ਭਰਮ ਦਾ ਸਾਇਆ ਜਿਹੜਾ ਪੈਂਦਾ ਸਾਇਆ ਸਦਾ ਹਜੂਰ ਹੈ ਭਰਮ ਨੇ ਕੇ ਸ਼ੋਰ ਕੱਟ ਕੇ ਅੰਤਰ ਜੋਤਰ ਬਸ ਇਹ ਤੁਸੀਂ ਜਿਹੜੇ ਤੁਹਾਡੇ ਉੱਪਰ ਪਰਫਰਮੇ ਸਾਇਆ ਸਦਾ ਹਜੂਰ ਅੰਤਰਜੋਤ ਅਸਪਿਰ ਅੰਦਰ है ਜੋਤ ਪ੍ਰਗਟ ਹੋ ਜੂਗੀ ਆ ਜਿਹੜੀ ਜੋਤ ਹੈ ਨਾ ਬਾਹਰ ਮਨ ਇਹਨੂੰ ਅੰਦਰੇ ਰੱਖੋ ਉਹ ਸਾਬ ਅੰਦਰ ਹੈ ਹਰ ਵਕਤ ਸਾਬ ਸਦਾ ਕੋਈ ਨਹੀਂ ਲਗਦਾ ਵੀ ਸਾਬ ਹੈ ਨਹੀਂ ਕੀ ਉੱਚੀ ਕਰੇ ਪਕਾਰ ਅਸਲ ਵਿੱਚ ਕੀ ਗੱਲ ਹੈ ਸਾਬ ਉੱਥੇ ਜਾ ਕੇ ਲਬਦਾ ਕਹਿੰਦਾ ਕੋਈ ਘਰ ਵੀ ਆਇਆ ਕਿ ਨਹੀਂ ਬੋਲਦਾ ਨਹੀਂ ਕੋਈ ਤੈਨੂੰ ਜੇ ਫੇਰ ਉਹ ਨਾ ਕੋਈ ਬੋਲੇ ਕੋਈ ਘਰ ਨਹੀਂ ਚਲੀਏ ਫੇਰ ਚਲੀਏ ਨਹੀਂ ਘਰ ਕੋਈ ਹੈ ਨਹੀਂ ਘਰ ਜਿਹੜੀ ਕਹਿੰਦੀ ਸੀ ਸਰ ਨਹੀਂ ਕੋਈ ਕਹਿੰਦਾ ਜੇ ਕੋਈ ਆਇਆ ਆਇਆ ਨੇ ਉਹ ਬੋਲਦੇ ਫਿਰ ਕਹਿੰਦੇ ਨਹੀਂ ਅੰਦਰ ਨੂੰ ਬੋਲਣ ਦੇ ਪਤਾ ਲੱਗਣਾ ਔਰ ਜੇ ਕੋ ਕੋ ਵੀ ਹੈ ਫੇ ਗਈ ਗੱਲ ਜਾ ਆਵੇ ਸ਼ਰਮ ਨਹੀਂ ਸੁਨੂੰ ਨੈਣ ਨਹੀਂ ਪੇਖੂੰ ਯਾਦ ਦੁੱਖ ਕਾਸੂ ਕਹੂੰਲੀ ਉਹੀ ਤਾਂ ਗੱਲ ਹੈ ਹੋਰ ਕੀ ਹੈ ਮੈਂ ਸ਼ਰਮ ਨਹੀਂ ਸੁਨੂੰ ਦਾ ਕਹਿ ਤਾ ਪਰ ਉਹ ਕਿਹਦੀ ਹੈ ਇਹ ਪਤਾ ਮੈਨੂੰ ਨੈਣ ਨਹੀਂ ਪੇਖੂੰ ਯਾਦ ਦੁੱਖ ਨਹੀਂ ਅੱਛਾ ਨੈਣ ਨਹੀਂ ਇਹਨਾਂ ਹੈ ਤਾਂ ਇਹ ਸੁਣਦੀ ਹੈ ਵਾਇਰ ਪਰ ਉਹ ਖਾਣੀ ਜਿਹੜੀ ਇਹਨਾਂ ਦੇਖ ਲਵਾ ਹਾਂ ਆਇਆ ਗੱਲ ਯਾਦ ਕਸੂਕ ਨਹੀਂ ਨਹੀਂ ਲਿਖੇ ਨਹੀਂ ਇਹ ਉਹਨਾਂ ਦੇ ਨਾਮ ਪੈਖੂ ਅੱਛਾ ਅੱਛਾ ਨਹੀਂ ਨਹੀਂ ਉਹਨਾਂ ਦਾ ਨਾਮ ਦਿਸਦਾ ਨਹੀਂ ਫੇਰ ਆਉਂਦਾ ਫੇਰ ਦਾ ਉਹਦਾ ਨਾਮ ਨਹੀਂ ਨਹੀਂ ਸੀ ਉਹਨਾਂ ਨੈਲ ਨਹੀਂ ਨੈਲ ਹੈ ਉਹ ਨਹੀਂ ਜਿਹਨਾਂ ਦੇਖ ਸਕੇ ਹੈ ਹੀ ਨਹੀਂ ਉੱਥੇ ਉਹਦਾ ਲੈਣ ਨਾ ਲੈਣ ਬਹੁਤ ਭਰ ਗਿਆ ਹੈ ਹੈ ਬਹੁਤ ਭਰ ਗਿਆ ਨਾ ਰੰਗ ਲੈ ਲੈ ਦੂਵੇ ਬੜਾ ਉਹਨਾਂ ਸਾਰੇ ਉੱਤਨ ਹਰਕਾ ਦਾ ਨਾਮ ਮੋਜ ਲਾਇਆ ਹੁੰਦਾ ਟੀਜਾ ਰੋ ਉੱਥੇ ਲਿਖਿਆ ਹੁੰਦਾ ਕਾ ਇਹੋ ਜਿਹੇ ਜੱਕਾ ਪੱਲਾ ਭਰ ਜਾਂਦਾ ਲੋੜੀ ਮਗਲ ਆ ਲਿਆ ਉਹ ਮੈਂ ਕਹਾਂ ਮੈਂ ਪਤਾ ਤਾਂ ਭਰ ਗਿਆ ਹੁਣ ਮੈਨੂੰ ਕੰਡੋ ਰਿਹਾ ਮੈਂ ਕਹਾਂ ਫੇਰ ਮੱਲਾ ਫੇਲਾ ਗਿਆ ਕਰਦਾ ਹੈ ਰਾਜਾ ਹਰਕਾ ਨਾਮ ਅਮਰਤ ਹੈ ਹਰਕਾ ਨਾਮ ਅਮਰਤ ਹੈ ਦਾਰੂ ਇਹ ਲਾਇਓ ਲਾਇਓ ਲਾਇਓ ਹਕਾ ਨਾਲੋਂ ਬਰਤ। ਅੰਤ ਕਾ ਰੋਮੀ ਨੇ। ਜੋਤ ਦਾ ਜੋ ਘੇਰ ਰੋਦੇ। ਬਮਰਤ। ਜਿਹੜੀ ਸੋਚੀ ਸਾਨੂੰ ਆਉਂਦੀ ਹੈ ਨਾ। ਦਰਗਾਵੋਂ। ਬਮਰਤ। ਬਮਰਤ ਦਾ ਨਾ ਤਾਂ ਉਹ ਖਤਮ ਹੁੰਦੀ ਹੈ ਕਦੇ ਵੀ। ਨਾ ਉਹ ਬੈੜੀ ਹੁੰਦੀ ਹੈ ਕਦੇ ਵੀ। ਦਾ ਉਹਦੇ ਤੇ ਭਰਮ ਦਾ ਅਸਰ ਹੁੰਦਾ ਕੋਈ ਵੀ ਸਭੋ ਭਰਮ ਦਾ ਤਾਂ ਨਾਸ ਕਰ ਦਿੰਦੀ ਉਹ ਜਿਹੜਾ ਅਮਰ ਤਾਂ ਇਹੇ دارو ਹੈ دارو ਇਹੋ ਲਾਇਓ ਸੇ دارو ਦਾ ਸਤਿਗੁਰੂ ਕਾ ਭਾਣਾ ਚਿੱਤ ਰੱਖੋ ਸੰਜਮ ਸੱਚਾ ਨੇੋ ਚਿੱਤ ਵਿੱਚ ਸਤਿਗੁਰ ਦਾ ਭਾਣਾ ਰਵੇ ਸਾਰਾ ਰੱਖੋ ਆ ਜਿਹੜਾ ਭਾਣਾ ਉਦੀ ਟਕਰਾਂ ਕੀ ਵਾਰ ਦੇਣਾ ਜਗਾ ਜੀ ਪਵਿੱਤਰ ਹੋ ਗਈ ਆ ਇਹ ਸਭ ਗਲਤਾਂ ਪੈਦਾ ਹੁੰਦੇ ਪੁਛਰੀ ਬਾਹਰ ਕੁਛ ਹੈ ਹੀ ਨਹੀਂ ਜਦ ਕਹਤਾ ਸਭ ਫਿਰ ਜਗਾ ਪਵਿੱਤਰ ਰਹਿਣਾ ਬਵਿੱਤਰ ਤੁਸੀਂ ਲੈਣਾ ਕੀ ਹੈ ਇਹ ਜਿਆਦਾ ਜਆ ਤੁਸੀਂ ਅੰਦਰ ਜੁੜੇ ਹੋਏ ਇਹ ਤਾਂ ਸਾਰੀ ਥੁੜੀਆਂ ਗੱਲਾਂ ਨੇ ਸੱਟ ਭੁੱਖ ਪਜਾਈ ਨਹੀਂ ਮਿਲਦੀ ਹੈ ਬਾਹਰ ਲਈ ਕੋਈ ਜਾਂਦਾ ਹੋਰ ਨਾ ਕੋਈ ਰਣਪੁਰ ਸਾਹਿਬ ਜਾਵੇ ਨਾ ਕੋਈ ਹੋਰ ਇੱਥੇ ਜਾਵੇ ਉਹ ਭੁੱਖ ਪਜਾਈ ਨਹੀਂ ਫਿਰਦੀ ਮੁੜ ਅਧਿਕਾਰੇ ਵਿੱਚ ਤਾਂ ਕੁਝ ਲੱਭ ਜੂ ਹੁਣ ਸਾਡੀ ਸ਼ਰਧਾ ਹੋ ਗਈ ਉਹ ਹੋ ਗਈ। ਭੁਖਾ ਦਾ ਇਲਾਜ ਨਹੀਂ ਕਰਦੇ। ਉਹ ਤਾਂ ਬਧਾਈ ਫੜਦੇ। ਜਦੋਂ ਭੁਖਾ ਦਾ ਇਲਾਜ ਕਰ ਲਾਂਗੇ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਰਹੇਗੀ। ਸਿਰ ਸਾਨੂੰ ਪਹਿਰਾ ਹਕੂਮਤ ਦੇਣਾ ਪੈਂਦਾ। ਸਤਿਗੁਰੂ ਦਾ ਪਾਣਾ ਚੁਣੇ ਦੇ ਪਹਿਰਾ ਦੇਣਾ ਪੈਂਦਾ। ਸੰਜਮ ਹੋਰ ਕੀ ਕਰਦੇ ਇੱਥੇ ਵੀ ਕਹਿੰਦਾ ਸੰਜਮ ਸੱਚਾ ਨੇ ਹੋ ਸਤਿਗੁਰੂ ਦਾ ਪਾਣਾ ਚਿਤ ਸੰਜਮ ਫੇਰ ਸਿੱਖ ਗੁਰੂ ਗੁਰੂ ਸਿੱਖ ਹੈ। ਇਹ ਕੋਈ ਫਰਕ ਨਹੀਂ ਸਤਿਗੁਰਤਾ ਤੇ ਲਿਆ ਨੂੰ ਫਰਕ ਕਰੇ ਸਮਾਪਤ ਹੋ ਜਾਂਦਾ ਇੱਕ ਹੋ ਜਾਂਦਾ ਸਤਗੁਰ ਕਾ ਪਾਣਾ ਜਿੱਦਾਂ ਇਹੋ ਚੱਲ ਸਮਾਪਤ ਹੋਣਾ ਚੱਲਨੀ ਫਰਕ ਹੁੰਦਾ ਜਿੰਨਾ ਚ ਸਾਡੀ ਦ੍ਰਿਸ਼ਟੀ ਚ ਪਾਣਾ ਇਹ ਕਾਣ ਦ੍ਰਿਸ਼ਟੀ ਇਹ ਜਗ੍ਹਾ ਪਵਿੱਤਰ ਹੈ ਦ੍ਰਿਸ਼ਟੀ ਚ ਪਾਉਣ ਦੀ ਬੰਦਾ ਹੋਰ ਕੁਝ ਕਮਜ਼ੋਰੀ ਹੈ ਸਾਡੀ ਕਮਜ਼ੋਰੀ ਹੈ ਮਨੋਕਠੋਰ ਮਰੇ ਬਨਾਰਸ ਨਰਕ ਨਾ ਬਚਿਆ ਜਾਈ ਜਿਹੜੇ ਤੁੰ ਕਹਿੰਦੇ ਸੀ ਦਸ਼ਮ ਬਾਸ਼ਾ ਜਰੂ ਤੁਸੀਂ ਤੇੜੀ ਮੁਖੀ ਨਹੀਂ ਕਰਦੀ ਜਿਹੜਾ ਅਵਰਤ ਮੈਂ ਤਿਆਰ ਕੀਤਾ ਨਾ ਕੱਲੇ ਨੇ ਤਾਂ ਬਣਾ ਮੈਨੇ ਜੀ ਆ ਇੱਕ ਵੇ ਕਰ ਲੈਣਾ ਕੀਤਾ ਜਦੋਂ ਪੰਜਾ ਤਿਆਰ ਕਰਵਾਇਆ ਪਹਿਲਾਂ ਮੈਨੂੰ ਚੁਕਾ ਇਹ ਮળો ਤਾਂ ਉਹਦੇ ਨਾਲ ਸ਼ਕਤੀਸ਼ਾਲੀ ਹੈ ਜਿਹੜਾ ਮੈਂ ਤਿਆਰ ਕੀਤਾ ਸੀ ਫਿਰ ਕਿਸੇ ਹੋਰ ਨੂੰ ਚੁਕਾਇਆ ਜੇ ਆਪ ਨਾ ਗੱਲ ਕਹਿੰਦੇ ਆਪ ਚੱਲ ਤਾਂ ਸਾਰੇ ਇਹ ਕਹਿੰਦੇ ਕਿ ਜੇ ਤੁਸੀਂ ਇੰਤਿਹਾਰ ਕਰੋ ਸੀ ਤਾਂ ਉਹੀ ਚਰਨਗੇ ਰਾਣਾ ਨਹੀਂ ਉਹ ਨਾਲਾ ਘਟ ਗਿਆ ਹੋ ਗੁਰੂ ਗੁਰੂ ਦਾ ਵਧੀਆ ਕਹਿੰਦੇ ਮੇਰੇ ਨਾਲ ਘਟ ਗਿਆ ਸੀ ਵਧੀਆ ਇਹ ਤਾਂ ਉਹ ਤੋਂ ਪਹਿਲਾਂ ਇੱਕ ਕੱਲਾ ਆਣਾ ਵੀ ਅਮਰ ਤਿਆਰ ਹੋਇਆ ਪਹਿਲਾਂ ਬਾਅਦ ਤਾਂ ਕੱਲੇ ਨੂੰ ਕਦੇ ਕੀਤਾ ਹੀ ਤਿਆਰ ਜਾਂ ਉਹਨਾਂ ਨੇ 10 ਵਾਰੀ ਦੇ ਫੇਰ ਮੈਂ ਆਪਣੇ ਦਾ ਅਧਿਕਰਾਇਆ ਸੀ ਨਾ ਤਿਆ ਉੱਪਰ ਮੁਕਰਣ ਵਾਸਤੇ ਹੋਣਾ ਵੀਰ ਪਰ ਚੱਲਣਤੀ ਹੋਣਾ ਨਹੀਂ ਪ੍ਰਚਲਿਤ ਹੋਣਾ ਹੀ ਨਹੀਂ ਸੀ ਐਨੀਆਂ ਤੁਹਾਨੂੰ ਉੱਤੀ ਜਾਣੀ ਦੀ ਲੋੜ ਦਾ ਅੱਜ ਵੀ ਨਹੀਂ ਕੋਣ ਬਣਾਉਂਦਾ ਅੱਜ ਕੋਣ ਇਹ ਗੱਲਾਂ ਅਸੀਂ ਸੁਣੀਆਂ ਨੇ ਨਾ ਪ੍ਰਚਾਰੀਆਂ ਨੇ ਨਾ ਸਾਡੇ ਤੇ ਬਹੁਤ ਤਾਕੜਾ ਪਰਮਜਾ ਦੀ ਧੂਰ ਦਾ ਹੂੰ ਆਪਣੇ ਵਾਅਦੇ ਧਾਰ ਗਏ ਕਦੇ ਵਾਅਦੇ ਨਹੀਂ ਕਰਾਇਆ ਫਿਰ ਹੋਰ ਕਹੀ ਆਏ ਬਈ ਹੋਰ ਕਿਸੇ ਨੂੰ ਝਕਣਾ ਦਾ ਸ਼ੱਕ ਸਕਦਾ ਫਿਰ ਘੜੇ ਹੋਗੇ ਫਿਰ ਉਹਨੇ ਕਿਹਾ ਵੀ ਗੱਲ ਸੁਣ ਲੋ ਵੈਦਾ ਕਰਾਵੋਗੇ ਵੀ ਸਰਗੁਰੂ ਇਹ ਹੁਣ ਪੰਥ ਦਾ ਜਦ ਮਰਜੀ ਪੰਥ ਲੈ ਲਵੇ ਜਿਹਨੇ ਝਕਣਾ ਝਕਰੋ ਖੇ ਝਕਣਾ ਤੇ ਉਹ ਆ ਜਿਹੜੀ ਹੁਣ ਕਹਿੰਦੇ ਨੇ ਸਰਗੁਰੂ ਦਾ ਉਦੋਂ ਤਾਂ ਪ੍ਰਚਲਨ ਸਰ ਗੁਰੂ ਕਰਦਾ ਜਿਦੀ ਮਰਜ਼ੀ ਛਕ ਲੋ ਪਹਿਲਾ ਵਰਡ ਕਬੂਲ ਉਹੀ ਗੱਲ ਹੈ ਗੱਲ ਨਵੀਂ ਤਾਂ ਹੈ ਸਿੱਖੀ ਦਾ ਪ੍ਰਚਾਰ ਦਾ ਤੁਸੀਂ ਚੰਦਾ ਵਰਦਾਰ ਹੋ ਇਹਦੇ ਖਾਤਰ ਸਰਦਣਾ ਵੀ ਪੈ ਜੂਵੇ ਸਰਦੀਜਾ ਹੋਈ ਗੱਲ ਸੀ ਇਹ ਤੇ ਹੋਰ ਕੀ ਸੀ ਸਾਬ ਦੀ ਗੁਰਬਾਣੀ ਤੋਂ ਖਲਾਅ ਕਿਹੜੀ ਗੱਲ ਹੈ ਔਰ ਉੱਪਰ ਕਿਹੜੀ ਗੱਲ ਹੈ ਗੁਰਬਾਣੀ ਦੀ ਸਾਡੇ ਕੋਲ ਕਿਤੇ ਹੈ ਨਹੀਂ ਮਨ ਕੇ ਘਰ ਤਾਂ ਮੰਨਣ ਤੇ ਆ ਨਾ ਉਹਨੇ ਮੰਨ ਕੇ ਦਿਖਾਈ। ਉਹ ਹੀ ਵਸਤਾ ਤੁਹਾਡੀਆਂ ਬਨ ਕੇ। ਤਰੂੰ ਜ਼ਿੰਦਗੀ ਕੀ ਵਸਤਾ ਉਹ ਹੀ ਵਸਤਾ ਤਰੂੰ ਜ਼ਿੰਦਗੀ। ਬਰਨ ਲਿਆ। ਉਹ ਤੋਂ ਉਹਦੀ ਗੱਲ ਕਰਕੇ ਦੀਆਂ ਡਿਆ ਹੁਣ ਆਪਣੇ ਮਦੀਨਾ ਉਹ ਕੀ ਹੈ? ਉਹ ਵੀ ਉਹੀ ਗੱਲ ਹੈ। ਮਦੀਨਾ ਦੀ ਯਾਰ ਗੁਰੂ ਤੇਗ ਬਹਾਦਰ ਦੀ ਕੋਈ ਗੱਲ ਹੈ। ਪਤੀ ਦਾਸ ਪਤੀ ਦਾਸ ਭਾਈ ਦੇ ਅੱਲਾ ਸਾਰੀ ਬਾਗ ਨੇ ਕਿਰਕ ਦੇ ਘਰ ਮੰਨਿਆ ਨਹੀਂ ਇਹ ਸਾਨੂੰ ਪਰਮਤਮਾ ਤੁਮ ਆਪਣੇ ਹੀ ਖੁਲ ਲੋਰੀਏ ਸਾਡੇ ਉਹਨਾਂ ਨੂੰ ਵਰਤ ਨਹੀਂ ਜਿਹੜੇ ਪਾਸ ਹੋ ਗਏ ਪਤੀ ਦਾਸ ਉਹੇ ਵਰਤ ਨਹੀਂ ਜੀ ਪਤੀ ਦਾਸ ਉਹ ਕਹਿੰਦੇ ਤੂੰ ਕੀ ਚਾਹੁੰਦੇ ਉਹ ਕਹਿੰਦਾ ਗੁਰੂ ਵੱਲੋਂ ਉਹ ਹੋਵੇ ਉਹ ਗੁਰੂ ਜੀ ਦਾ ਜਾ ਕੇ ਮੇਰਾ ਹੌਸਲਾ ਬਣਿਆ ਰਹੇ ਹੋਰ ਕੁਝ ਨਹੀਂ ਹੈ ਤੇ ਹੁਣ ਨਾ ਬਣਿਆ ਰਹੇ ਮੰਡ ਹੋਰ ਨਾ ਜਾਵੇ ਆਪਣੇ ਮਨ ਕਿਹਾ ਇਹ ਗੱਲ ਦੀ ਉਹਨਾਂ ਨੂੰ ਨਹੀਂ ਕਹੀ ਹੈ ਹਾਂ ਉਹਨਾਂ ਨੂੰ ਨਹੀਂ ਕਹੀ ਹੈ ਗੱਲ ਆਪਣੇ ਮਨ ਤੁਸੀਂ ਜਿਵੇਂ ਇਹ ਨਹੀਂ ਮਜ਼ਬੂਤ ਰਹੇ ਜਿਵੇਂ ਹੋਣਾ ਹੈਗਾ ਫੋਲ ਕੀ ਗੱਲਾਂ ਤੁਸੀਂ ਕੁਝ ਵੀ ਨਹੀਂ ਇਹ ਵਸ ਤਿਆ ਕੋਈ ਬਹੁਤ ਹੀ ਬੰਨਰ ਨਾ ਮੰਨੇ ਕੀ ਕਹਤ ਫੇਰ ਨਹੀਂ ਜਾਂਦਾ ਮੈਂ ਬੰਨਰ ਨਾ ਵਸ ਬੰਨਰ ਵਸਾ ਬਣ ਕਈ ਨਾ ਜਾ ਦਸਿਨ ਜਾ ਸਕਦਾ ਸਤਗੁਰੂ ਕਾ ਪਾਣਾ ਬੋਲਣ ਦੇ ਕਰੇ ਹੋ ਸਤਗੁਰੂ ਕਾ ਨਹੀਂ ਮੰਨਦਾ ਉਹ ਨਜ਼ਰ ਕੇ ਸਤਿਗੁਰੂ ਦਾ ਭਾਣਾ ਚਿੱਤ ਰੱਖੋ ਸੰਜਮ ਸੱਚਾ ਨਿਰ ਸੰਧੂ ਸੱਚਾ ਨਿਰ ਸੱਚ ਨਾਲ ਜਿਹੜਾ ਪਿਆਰ ਹੈ ਫਨਮ ਕੀਆ ਤੁਹਾਡਾ ਸਾਡੀ ਮਿਹਨਤ ਕੀ ਹੈ ਸਿਰਦਰ ਦੀ ਹੈ ਥੋੜਾ ਥੋੜਾ ਕਰਨਾ ਚਾਹੀਏ ਥੋੜਾ ਥੋੜਾ ਕਰਕੇ ਮੋਹ ਥੋੜਾ ਥੋੜਾ ਥੋੜਾ ਥੋੜਾ ਕਰਕੇ ਸੱਚ ਜਾਣੇ ਪੱਛਾਜੇ ਨਾਲੇ ਜੁੜੀ ਜਾਣੇ ਝੂਠ ਨਾਲੋਂ ਬਣਾਉਂ ਜਿਹੜਾ ਉਹ ਕਟਾਈ ਜਾਣੇ ਇੱਕ ਦਿਨ ਐਸਾ ਜਾਣਾ ਸਾਰੇ ਇੱਧਰ ਡੁੱਟ ਜਾਣੇ ਹੌਲੀ ਹੌਲੀ ਨਾਲਕ ਇੱਥੇ ਸੁੱਖੇ ਅੰਦਰ ਰੱਖ ਸੀ ਅੱਗੇ ਹਰ ਕੇਲ ਕਰਿਓ ਇੱਥੇ ਸੁੱਖੇ ਅੰਦਰ ਰੱਖ ਸੀ ਜਿਹੜਾ ਜਦ ਤੱਕ ਰਹੋ ਦੁੱਖ ਲੱਗਣੇ ਨਹੀਂ ਦੋ ਇਹ ਪਰ ਸੱਤੇ ਚੱਲਦਾ ਦੁੱਖ ਨਹੀਂ ਲੱਗ ਰਿਹਾ ਜਿਹਾ ਪਾਣੇ ਚ ਇਹ ਪਰ ਸੁੱਖੇ ਇੱਥੇ ਸੁੱਖੀ ਰੱਖ ਲਿਆ ਤੁਹਾਨੂੰ ਅੱਗੇ ਕੀ ਹੁੰਦਾ ਅੱਗੇ ਹਰ ਸੋ ਕੇਲ ਕਰਿਓ ਅੱਗੇ ਤਾਂ ਕੋਈ ਲੱਖ ਖੁਸ਼ੀਆਂ ਬਾਦਸ਼ਾਹੀਆਂ ਕੇਲ ਹੈ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੀ ਖਾਤਰ ਕੱਲ੍ਹਾਈ ਕੇਲ ਲਵੋ ਇੱਕ ਖਾਹਰਲਾ ਖੇਲ ਹੈ ਜਿਹਨੂੰ ਕਿ ਅਚੰਤੇ ਬਾਜਪੇ ਖੇਲ ਕਰਦੇ ਹਾਂ ਜਨੂੰ ਉਹ ਖੇਲ ਉਹ ਮਾਇਆ ਨਾਲ ਹੱਥੋਂ ਖੇਲ ਮਾਇਆ ਭੁੱਲਿਆ ਹੈ ਉਹ ਮਾਇਆ ਸੋ ਖੇਲ ਹੈ ਹੱਥ ਹੱਥੋਂ ਖੇਲ ਹੈ ਇੱਕ ਜਨ ਕੇ ਸਰੀਰ ਨਾਲ ਜੁੜ ਕੇ ਚੱਲਦਾ ਹੈ ਚੱਲਦਾ ਹੋਈ ਹੈ ਢਲ ਗਈ ਉਹ ਢਾਹ ਦੇ ਉੱਤੇ ਜਿੱਟ ਡਿਗੜੀ ਆ ਉਹ ਸੀਰੀ ਲਾ ਕੇ ਸੋ ਥੋੜਾ ਜਨਾ ਹੋ ਜਾਂਦਾ ਉਹ ਗੇਲ ਦਾ ਖਾਉਂਦਾ ਕਿਉਂਕਿ ਉਹਦੇ ਬੰਦੇ ਬੈਠੇ ਨੇ ਪਰ ਉਹਨੂੰ ਨਹੀਂ ਪਤਾ ਵੀ ਆਪਣੀ ਰੋਟੀ ਉੱਤੇ ਲਓ ਚੱਲ ਰਿਹਾ ਫੜੀ ਗਈਆਂ ਨੇ ਦਰਿਆ ਦੇ ਆ ਬਚਾਲੇ ਜਾਂ ਪਤੀਲਾ ਲੈਦਾ ਦੌੜ ਦੇ ਕੇ ਸਾਰੇ ਪਤੀਲਾ ਪੀ ਜਾ। ਬਸ ਠੀਕ। ਥੋੜੇ ਹੋਰ ਦੇ। ਹੋ ਗਿਆ ਨਾ? ਕੈਲ ਕਰੰਦੇ ਹੰਜੇ ਜਿੰਦੇ ਤੇ ਸਰਾ ਬਰੇ ਕੇਲਾ ਬਿਸਰੀਆ। ਆ ਬਿਸਰੀਆ ਕੇਲਾ। ਆਪਣੀ ਉਸ ਪੀ ਸੰਤ ਚੁਟੇ। ਮੇਰੀ ਪਤਾ ਨਹੀਂ ਕਿ ਜੀ ਹੈ।